ਸੋ ਲੋਕ ਮਹੱਲਾ ਤੀਜਾ ਸਤ ਤੇ ਜੋ ਮੂੰਹ ਫਿਰੇ ਸੇ ਮੱਦੇ ਦੁੱਖ ਸਹਾਂਇ ਸਤ ਗੁਰ ਤੇ ਜਿਹੜੇ ਮੁਖ ਫੇਰ ਲੈਂਦੇ ਨੇ ਗੁਰ ਬਾਣੀ ਤੋਂ ਜਿਹੜੇ ਮੁਖ ਫੇਰ ਲੈਣਗੇ ਗੁਰ ਸੁਣ ਕੇ ਨਹੀਂ ਮੰਨਣਗੇ ਜਾਇ ਕਾਰਨ ਕੋਈ ਵੀ ਹੋਵੇ ਨਾ ਮੰਨਣ ਦਾ ਉਹ ਜਨਮਾਂ ਦੇ ਚੱਕਰ ਚ ਪੈ ਜਾਣਗੇ ਮਾਇਆ ਨਾਲ ਵਧੇ ਰਹਿਣਗੇ ਮਾਇਆ ਤੇ ਬੰਦਣਾ ਨੂੰ ਕੱਟ ਨਹੀਂ ਸਕਣਗੇ ਮਾਇਆ ਨਾਲ ਬੱਝੇ ਰਹਿਣਗੇ ਤੇ ਜੰਮਣ ਵੱਲ ਤੇ ਘੇੜ ਚ ਪੈ ਜਾਣਗੇ ਜੰਮਣ ਵੱਲ ਦੇ ਹੋਏ ਦੁੱਖਾਂ ਸੰਦੇ ਰਹਿਣਗੇ ਹਾਂਜੀ ਹਾਂ ਤੇ ਜੇ ਮੂੰਹ ਫਰੇਈ ਨਾ ਪਾਵੇ ਨੀ ਵੀ ਸਤਗੁਰਤਾ ਗਿਆਨ ਹੋ ਗਿਆ ਹੈ ਜੀ ਕੋਈ ਸਤਗੁਰ ਗਿਆ ਹੈ ਕੁਰਬਾਨੀ ਦਾ ਇਹ ਤੋਂ ਬੂ ਫੇਰ ਲੈਣ ਸਤਗੁਰ ਵਿਅਕਤੀ ਨੂੰ ਕਿਹਾ ਜਾ ਸਕਦਾ ਸਤਗੁਰ ਕੇ ਜਾਲਿਆ ਸਤਗੁਰ ਤਿਸका ਇਹਤੇ ਵਿਅਕਤੀ ਨੂੰ ਸਤਿਗੁਰ ਮੰਨ ਕੇ ਚੱਲਣਾ ਪਏਗਾ ਸਾਡੇ ਕੋਲ ਹੁਣ ਇਸ ਵੇਲੇ ਸਤਪੁਰ ਦੇ ਬੱਚੇ ਵੀ ਗੁਰਮਖੀ ਸਤਗੁਰ ਦੇ ਬੱਚੇ ਨੇ ਰੂਪ ਦੇ ਸਤਗੁਰ ਪ੍ਰਗਟ ਹੈ ਸਾਡੇ ਗਿਆਨ ਤੇ ਹੀ ਚੱਲਦੇ ਨੂੰ ਮੂੰਹ ਫੇਰੀ ਫਿਰਦਾ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਫਿਰ ਫਿਰ ਮਿਲਣ ਨਾ ਪਾਇਨੀ ਜਮੈਂ ਤੈ ਮਰ ਜਾਹੀਂ ਮਤਲਬ ਚੱਕਰ ਜਲਬ ਲੈਦੇ ਰਹੇ ਨੇ ਪਰ ਚਿੱਤਰ ਦੀ ਇਕਤਾ ਦੀ ਹੁੰਦੀ ਕਹੋ ਕਿਤਰਾ ਬਿਲਾਪ ਨਹੀਂ ਆਪਣੇ ਮੂਰਖਾ ਬਿਲਾਪ ਨਹੀਂ ਹੁੰਦਾ ਚਲ ਵਿੱਚ ਕਿਸੇ ਵੀ ਜਨਮ ਦਾ ਨਹੀਂ ਦੂਸਰਾ ਭਾਵ ਹੈ ਕਈ ਪੌਣੇ ਨੇ ਉਹ ਬਾਹਰ ਘਪੜਵਾਰੀ ਪੈ ਰਹੇ ਨੇ ਪਰਵਰਨ ਦਾ ਬਿਲਾਪ ਨਹੀਂ ਹੁੰਦਾ ਸਹਿਸਾ ਰੋਗ ਨਾ ਛੋਡੇਈ ਦੁੱਖ ਹੀ ਮਹਿ ਦੁੱਖ ਪਾਹੇ ਦਾ ਰੋਗ ਹੈ ਉਹਦਾ ਪਿੱਛਾ ਦੀ ਛੜਦਾ ਖੜਦਾ ਨਹੀਂ ਛੜਦਾ ਸਹਿਸਾ ਉਂਦੀ ਹੈ 1000 ਰੁਪਏ ਹੈ ਪਰਵਰਨ ਦਾ ਕਹਿਣਾ ਨਹੀਂ ਛੜਦਾ ਕਿਸੇ ਜੂਤ ਦੇ ਵਿੱਚ ਵੀ ਦੁਖ ਹੀ ਮੈਂ ਦੁੱਖ ਪਾਹੇ ਦੁੱਖ ਤਾਂ ਹਰ ਵਕਤ ਹੈ ਪਰ ਜਿਹੜੇ ਹੋਰ ਦੁੱਖ ਆ ਜਾਂਦੇ ਨੇ ਦੁੱਖਾਂ ਦੇ ਵਿੱਚ ਇਹ ਦੁੱਖ ਕਦੇ ਵੀ ਉਹਦਾ ਸੁੱਖ ਹੋ ਸਕਦਾ ਬਖਸ਼ ਲੈਹੇ ਸ਼ਬਦੇ ਮੇਲ ਮਿਲਾਹੇ ਇਹ ਉਹਦੇ ਤੇ ਬਖਸ਼ੋ ਜਿਵੇਂ ਪਰਮੇਸ਼ਰ ਦੀ ਤਾਂ ਉਹ ਸ਼ਬਦ ਨੂੰ ਸੁਣ ਲੈਂਦਾ ਉਹ ਸ਼ਬਦ ਨੂੰ ਹਰ ਬਕੁਰਬਾਨੀ ਦਾ ਪ੍ਰੇਮ ਕਰ ਲੈਂਦਾ ਹੈ ਗੁਰਬਾਨੀ ਨੂੰ ਬੋਲ ਲੈਂਦਾ ਫਿਰ ਬੇਲ ਬਲ ਜਾਂਦਾ ਉਹਦਾ ਚੇਤਰ ਬੋਲੀ ਇੱਕ ਹੋ ਜਾਂਦਾ ਅੰਤਰਰਾਸ਼ਟਰੀ ਆਵਾਜ਼ ਦੇ ਅਸਾਰ ਚੱਲਦਾ ਫਿਰ ਉਹ ਜਿਹੜੇ ਅੰਤਰਰਾਸ਼ਟਰੀ ਆਵਾਜ਼ ਤੋਂ ਡੀਮ ਉਹ ਤਖੁਜ ਰਹਿੰਦੇ ਨੇ ਜਿਹੜੇ ਅੰਤਰਰਾਸ਼ਟਰੀ ਆਵਾਜ਼ ਨਾਲ ਇੱਕ ਹੋ ਕੇ ਚੱਲਦੇ ਨੇ ਆਪਣਾ ਭਾਗੋ ਤਿਆਗ ਦਿੰਦੇ ਨੇ ਉਹਨਾਂ ਬਿਲੇ ਹਕੇ ਜਿਹੜਾ ਗੁਰਕੇ ਬਾਣੀ ਚੱਲਦਾ ਉਹ ਬਿਲੇ ਆਇਆ ਗੋਲ ਨਾਲ ਨਾਲ ਜਿਹੜਾ ਆਪਣੇ ਭਾਗ ਚੱਲਦਾ ਉਹ ਬਿਛੜਿਆ ਹੈ ਬਿਛੜ ਚੋਟਾ ਖਾ ਠੀਕ ਜੀ ਭਾਈ ਮਹੱਲਾ ਤੀਜਾ ਜੋ ਸਤਗੁਰ ਤੇ ਮੂੰਹ ਫਿਰੇ ਤਿੰਨਾ ਠੌਰ ਨਾ ਠਾਉ ਜਿਉ ਛੁੱਟੜ ਘਰ ਘਰ ਫਿਰੈ ਦੋ ਚਾਰਨ ਬਦਨਾਉ ਹਾਂ ਜਿਹੜਾ ਸਤਗੁਰ ਤੇ ਮੂੰਹ ਫੇਰ ਲੈਂਦਾ ਖਿੱਦੇ ਨੂੰ ਖੋਜਦਾ ਕੋਣਾ ਉਹਦੇ ਘਰ ਉਹਨਾਂ ਦਾ ਹੁੰਦੇ ਤੇ ਜਿਹੜਾ ਠੀਕ ਹੈ ਜੀ ਜਿਉਂ ਛੁੜ ਕਾ ਲਿ ਫੜੇ ਰੈਵਲੇ ਬਕਾਨਾ ਵਾਲੇ ਕਿੱਥੇ ਖਾਣਗੇ ਠੀਕ ਹੈ ਜੀ ਜਿਉਂ ਛਟੜ ਘਰ ਘਰ ਫਿਰੈ ਦੋ ਚਾਰਨ ਬਦਨਾਉ ਜਿਉਂ ਖਾਦੋਂ ਨੂੰ ਛੱਡ ਕੇ ਖਾਦ ਛੋਟ ਦੂਤੀ ਲੱਗੇ ਡੁੱਗੇ ਸੇ ਜਾ ਰਿਆ ਖਾਦੋਂ ਕੌਣ ਇਹ ਸੱਚ ਸਮਝ ਨਾ ਖਾਦ ਜਿਹੜਾ ਸੱਚ ਤੋਂ ਮੂੰਹ ਫੇਰ ਲੈਂਦਾ ਉਹ ਕਿਤੇ ਕਾ ਲੂ ਤਰੀ ਵਾਸਤੇ ਆਇਆ ਜੂ ਛੁੱਟੜ ਘਰ ਘਰ ਫਿਰਦਾ ਆਹ ਆਹ ਓਹ ਤਰੀ ਵਾਸਤੇ ਆਇਆ ਜਿਵੇਂ ਉਹਨੂੰ ਖਸਮ ਤੇ ਆਖ ਦੇਵੇ ਆਪਣਾ ਉਹ ਫਿਰ ਬਦਲੋ ਬੀ ਹੁੰਦੀ ਆ ਉਹਦੀ ਕੋਈ ਪੁੱਛਿਆ ਲੈਂਦਾ ਕੋਲਦਾ ਐ ਪੂਰਾ ਉੱਧਾ ਉੱਥੇ ਹੀ ਜਾਂਦਾ ਕੋਈ ਤਰ ਹੁੰਦੀ ਰਹਿੰਦਾ ਉਹ ਚਿੱਤਰ ਹੁੰਦਾ ਤਿਆਰ ਕਰਕੇ ਕੋਈ ਤਰ ਹੁੰਦੀ ਰਹੇਗੀ ਠੀਕ ਹੈ ਸਾਰੇ ਘਰ ਵਿੱਚ ਕੋਈ ਜਾਈ ਵਾਸਤੇ ਆ ਵੀ ਆਚਰਣ ਤੋਂ ਗਿਰ ਜਾਣੇ ਔਰ ਬਦਨਾਮੇ ਹੋ ਕੇ ਜਾਣੇ ਹੈ ਜੀ ਬਿਲਕੁਲ ਬਿਲਕੁਲ ਬਿਲਕੁਲ ਠੀਕ ਹੈ ਜੀ ਇੱਥੇ ਵੀ ਬਦਨਾਮੀ ਖੜਦੇ ਆ ਦਰਗਾਹ ਆ ਜੀ ਨਾਨਕ ਗੁਰਮੁਖੀ ਬਖਸ਼ਿਆ ਮੇਲ ਮਿਲਾਓ ਨਾ ਗੁਰਮੁਖਾਂ ਅੰਦਰ ਤੇ ਬਖਸ਼ਿਓ ਇਹ ਪਰਮੇਸ਼ਰ ਦੀ ਜਿਹਦੇ ਬਖਸ਼ਿਸ਼ ਹੋਈ ਉਹ ਗੁਰਮੁਖਾਂ ਦਾ ਇਹਦੇ ਬਖਸ਼ਿਸ਼ ਜੁੱਤੀ ਹੋਈ ਗੁਰੂ ਆ ਗੁਰੂ ਆ ਹਾਂ ਉਹਨਾਂ ਦਾ ਮੇਲ ਮਿਲਦਾ ਤੇ ਸਤਗੁਰ ਮੇਲ ਮਿਲਾਉ ਬਹੁਤ ਸਤਗੁਰ ਉਹਨਾਂ ਨੂੰ ਮੇਲ ਬੁਲਾ ਦਿੰਦਾ ਠੱਗਾ ਗਿਆ ਨਾਲ ਇੱਕ ਕਰ ਦਿੰਦਾ ਇੱਕ ਹੋ ਜਾਂਦੇ ਲੋ ਉਹ ਇੱਕ ਹੋ ਜਾਂਦੇ ਮੁਕਤ ਹੋ ਜਾਂਦੇ ਪੌੜੀ ਜੋ ਸੇਵ ਹੈ ਸਤ ਮੁrar ਸੇ ਭਵਜਲ ਤਰ ਗਿਆ ਜੋ ਬੋਲੇ ਹਰ ਹਰ ਨਾਮ ਤਿੰਨ ਜਮ ਛੱਡ ਗਿਆ ਸਤ ਮੁrar ਲਾ ਫਾਇਆ ਹੁਣ ਜਾਨੀ ਪਿਛਲੀ ਭਾਸ਼ਾ ਦੇ ਵਿੱਚ ਪਿਛਲੇ ਧਰਮ ਦੇ ਵਿੱਚ ਬੁਰਾਈ ਲੱਭਦਾ ਹੈ ਕਿਸੇ ਨਾਤੇ ਪਰ ਨਾਲ ਸਤ ਨਹੀਂ ਲੱਗਿਆ ਸਤ ਨਾਲ ਲਾ ਕੇ ਉਹ ਬੁਰਾਈ ਨਹੀਂ ਆ ਤੁਸੀਂ ਬੰਦੇ ਨੂੰ ਕਹਿੰਦੇ ਸਤ ਮੁrar ਠੀਕ ਹੈ ਇਹ ਹਮੇਸ਼ਾ ਹੀ ਹੈ ਬੁਰਾ ਉਹਦਾ ਲਖੋੜਾ ਹੈ ਮੇਰੇ ਦੁਸ਼ਮਣਾਂ ਦਾ ਤੁਸ਼ੂਲ ਉਹ ਅਰੀ ਜਿਹੜੇ ਬੁਕਾਰ ਦੇਣਾ ਦੁਸ਼ਮਣ ਬੁਕਾਰਾਂ ਨਾਲ ਸਾਡੇ ਦਾ ਤੁਸ਼ੂਲ ਬੁਕਾਰਾਂ ਆਤਮ ਗਿਆਨ ਉਹ ਵੇਹ ਦਾ ਥੱਲੇ ਦਾ ਗਿਆਨ ਇਹਦਾ ਜੋ ਓਗਰਾਂ ਦੇ ਜੋ ਸੇਮ ਹੈ ਸਤਮੁਰਾਰ ਸੇ ਤਰ ਗਿਆ ਫਸੋ ਬਹੁਤ ਵੱਲ ਤਰਗੇ ਇਹਨਾਂ ਸਤਿਗੁਰਾਂ ਦੀ ਸੇਵਾ ਕਰ ਲਈ ਜਿਹੜੇ ਗੁਰਬਾਣੀਆਂ ਤੋਂ ਸਾਧੀ ਨੇ ਆਪਣਾ ਜੀਵਨ ਢਾਲ ਲਿਆ ਹੂੰ ਜਿਹੜੇ ਬਵੇਖ ਦੇ ਦ੍ਰਿ ਨਾਲ ਤੋਂ ਹਰ ਚੀਜ਼ ਦਾ ਫੈਸਲਾ ਲੈਣ ਦੇ ਉਹ ਪਵਜਲ ਕਰ ਸਕਦੇ ਨਹੀਂ ਬਵੇਖ ਕੀ ਰਾਜਵੀ ਪਵਜਲ ਨਹੀਂ ਕਰ ਸਕਦਾ ਹਰ ਹਰ ਨਾਉ ਛੱਡ ਗਿਆ ਜਿਹੜੇ ਗੁਰਵੰਦੀਦਾਰ ਚਾਲੂ ਕੀਤਾ ਜਿਹਨੇ ਗੁਰਵਾਨੀ ਬੋਲੀ ਹੈ ਇਹ ਹਰ ਹਾਲ ਨੋ ਨ ਬੋਲੇ ਉਹਨਾਂ ਨੇ ਗੰਧ ਕੇ ਨਾਮ ਬੁਖਾਵੇ ਹਰ ਹਾਲ ਨਹੀਂ ਬੋਲਣਾ ਇਹ ਵੀ ਹਰ ਹਾਲ ਹਾਰ ਹਾਰ ਕਰੀ ਜਾਂ ਮੇਰੀ ਇਹਦਾ ਮਤਲਬ ਹੈਗਾ ਇਹ ਹਰ ਹਾਲ ਨੂੰ ਬੋਲੇ ਹੋਏ ਨੇ ਨਾ ਉਹਦੀ ਕੋ ਖੇਲ ਨਹੀਂ ਕੀਤਾ ਹੈ ਜਦੋਂ ਇਹਨਾਂ ਨੂੰ ਛੱਡ ਗਿਆ ਉਹਨਾਂ ਨੂੰ ਜੰਗ ਛੱਡ ਜਾਂਦਾ ਪਰ ਪਰਬਦੂਰ ਹੋ ਜਾਂਦਾ ਉਹਦਾ ਪਰਬਦੀ ਮੈਂ ਜਿਹੜੇ ਉਹਨਾਂ ਦੇ ਜੰਗ ਦਾ ਅਰਥ ਪਰਬ ਦੇ ਹੋਰ ਵੀ ਕੁਝ ਕੋ ਬੰਦਾ ਨਹੀਂ ਹੁੰਦਾ ਜੰਗ ਜਾਂ ਫਿਰ ਇਹ ਜੰਗ ਦੇ ਜਿਉਂਦੇ ਹੀ ਪਰਬ ਦੀ ਆਲੀ ਦੇ ਨਾ ਉੱਪਰ ਝੌਣ ਵਾਲੇ ਜਾਲ ਚ ਜੰਮਦੇ ਜਾਲ ਤੇ ਇਹ ਚੱਲਦੇ ਜਦੋਂ ਜਾਉਂ ਗਿਆ ਹੋਇਆ ਉਹ ਜੰਮ ਨਹੀਂ ਮੇਰੇ ਨੇੜੇ ਆਉਂਦਾ ਉਹਨਾਂ ਦੇ ਪਰਮ ਗਿਆਨੀ ਨੇ ਨੇੜੇ ਆਉਂਦਾ ਜਿਹੜੇ ਬਵੈਕੀ ਨਹੀਂ ਉਹਨਾਂ ਦੇ ਨੇੜੇ ਪਰ ਹੋ ਆਊਗਾ ਕੋਲ ਤਾਂ ਗਿਆਨ ਹੁੰਦਾ ਹੀ ਨਹੀਂ ਕਰ ਦਿੰਦੇ ਉਹ ਤਾਂ ਨੇੜੇ ਆਉਂਦਾ ਉਹਨਾਂ ਦੇ ਪਰਮ ਗਿਆਨੀ ਹੋਜੀ ਤੇ ਦਰਗਾ ਕਹਿੰਦੇ ਜਾਂਹੀਂ ਜਿੰਨਾ ਹਰ ਜਪ ਲਿਆ ਉਹ ਜਿਹਨਾਂ ਨੇ ਹਾਲ ਨੂੰ ਜਾਣ ਲਿਆ ਜਪ ਲਿਆ ਉਸ ਤੇ ਸਰਗਾ ਕਰਦੇ ਤੇ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਹੁੰਦੀ ਉਨਾ ਦੇ ਰਸਤੇ ਕੋਈ ਨਾ ਉੱਡਦੀ ਪਰ ਜੱਪ ਲਿਆ ਜੀ ਇਹਨਾਂ ਨੇ ਹਰ ਨੂੰ ਜੱਲ ਲਿਆ ਬੰਦੂ ਬਣਾਉਣਾ ਪਹਿਰਾ ਰਖਣਾ ਵਰਦੇ ਤੇ ਪਰ ਪਹਿਲਾਂ ਇਹੋ ਗੁਰਬਾਣੀ ਪਹਿਲਾਂ ਸਮਝਣੀ ਜੱਪੜੇ ਫਿਰ ਬੰਦੂ ਬਣਾਉਣਾ ਇਹ ਕਦ ਪੁਰਖ ਜਿਨ੍ਹਾਂ ਸੇਵਾ ਕਰਦੇ ਕਿਰਪਾ ਹੋਵੇ ਗਿਆ ਹੋਵੇ ਅੱਛਾ ਜੀ ਮਯਾ ਤੋਂ ਕੀ ਭਾਵ ਹੁੰਦਾ ਜੀ ਕਿਰਪਾ ਹਰ ਸੇਵੈ ਸਹੀ ਪੁਰਖ ਉਹੀ ਪੁਰਖ ਸੇਵਦੇ ਆ ਜਿਨ੍ਹਾਂ ਤੇ ਤੁਧ ਮਾਇਆ ਠੀਕ ਹੈ ਜੀ ਗੁਣ ਗਾਵਾਂ ਪਿਆਰੇ ਨਿੱਤ ਗੁਰਮੁਖੀ ਭ੍ਰਮ ਭੋ ਗਿਆ ਆ ਗੁਰ ਆਮਾ ਮਾਇਸ ਕਰਕੇ ਗੁਰਮੁਖ ਮੈਂ ਕੌਣ ਕਾ ਰਹੇ ਹਾਂ ਤੇਰੇ ਮੇਰਾ ਭਰਮ ਪਹੁੰਚ ਲਾ ਗਿਆ ਗੁਰੂ ਦਾ ਭਰਮ ਪਹੁੰਚ ਲਿਆ ਮੇਰਾ ਵੀ ਚਲਿਆ ਗਿਆ ਮੈਂ ਤਨ ਸੋਣ ਤੂੰ ਜੀ ਪਾਗਤ ਕਬੀਰ ਜੀ ਵੀ ਕਹਿੰਦੇ ਆ ਮੇਰਾ ਭਰਮ ਗਿਆ ਪਾ ਭਾਗਾ ਉਹੀ ਗੱਲ ਹੈ ਹਾਂਜੀ ਹਾਂਜੀ ਤੇ ਪਿਆਰਾ ਕੌਣਾ ਚਿਤਰੀ ਤਾਂ ਸਾਰਾ ਹੀ ਫਰਕ ਹੈ ਕਿ ਕਬੂਲ ਹੈ ਕਿ ਸਮੁੰਦਰ ਹੈ ਕਿ ਦਰਿਆ ਹੈ ਕਿ ਗੜਵੀ ਭਰੀ ਹੋਈ ਹੈ ਉਹਦਾ ਇੱਕੋ ਹੀ ਹੈ ਫਿਰ ਆਈ ਬਿਲ ਗੁਰਸਿਕ ਆਈ ਬਿਲ ਤੂੰ ਮੇਰੇ ਗੁਰੂ ਕੇ ਪਿਆਰੇ ਪਿਆਰਾ ਹੋ ਗਿਆ ਵੀ ਪਿਆਰਾ ਠੀਕ ਹੈ ਜੀ ਮੁੱਝ ਪਿਆਰੇ ਪਿਆਰੇ ਨਹੀਂ ਹੁ ਇਹ ਪਿਆਰਾ ਜਿਹਨਾਂ ਦਾ ਪਿਆਰ ਹੁੰਦਾ ਹੈ ਕੋਈ ਸਿੱਖਾਂ ਨੇ ਕੋ ਪਿਆਰ ਇਹਦਾ ਸਤਗੁਰ ਪਿਆਰਾ ਸਤਗੁਰ ਦਾ ਇਹ ਪਿਆਰਾ ਠੀਕ ਹੈ ਜੀ ਕਹਿੰਦਾ ਮੇਰੇ ਪੱਜ ਮੇਰੇ ਪਿਆਰੇ ਉਹਦਾ ਦਾ ਪਿਆਰ ਸਤਗੁਰ ਦਾ ਨਾਲ ਸਤਗੁਰ ਦਾ ਨਾਲ ਇੱਥੇ ਸੱਤਵੀਂ ਪੌੜੀ ਦੀ ਸਮਾਪਤੀ ਹੈ ਜੀ